ਪਾਕਿਤ ਕਬੀਰ ਜੀ ਵੱਲੋਂ 24ਵੀਂ ਪੌੜੀ 'ਚ ਉਪਦੇਸ਼ ਹੈ ਜੀ। ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ। ਦਦਾ ਦੇਖ ਜੋ ਜੋ ਬਿਨ ਸੰਹਾਰਾ ਜੋ ਕੋ ਦਿਖਾਈ ਦੇ ਰਿਹਾ ਸਾਨੂੰ ਇਹ ਸਭ ਨਾਸਵੰਤ ਹੈ ਬਿਨ ਹੈ। ਇਹ ਨਹੀਂ ਰਹਿਣਾ। ਜੋ ਅੱਖਾਂ ਨਾਲ ਦਿਖਾਈ ਦਿੰਦਾ ਇਹ ਸਭ ਨਾਸਵੰਤ ਹੈ। ਜਸ ਅਦੇਖ ਜੋ ਦੀਦਾ ਨਹੀਂ ਹੈ। ਸਰੀਰ ਹੈ ਜੋ ਇਹਦੇ ਦੀਦਾ ਜੋ ਕੋਈ ਦੀਦਾ ਸਰੀਰ ਇਹ ਸੁਨਾਰਾ ਜੋ ਦੀਦਾ ਨਹੀਂ ਹੈ ਇਹਦੇ ਵਿੱਚ ਤਾਂ ਸਰਾਖ ਵਿਚਾਰਾ ਉਹਦੀ ਵਿਚਾਰ ਕਰਦਾ ਰਹੇ ਇਹ ਬੋਲਦਾ ਕੌਣ ਹੈ ਜਿਹੜਾ ਬੋਲਦਾ ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ ਉਹ ਵਿਚਾਰ ਉਹਦੀ ਵਿਚਾਰ ਕਰਿਆ ਕਰ ਜਿਹੜਾ ਬਾਹਲਾ ਸਰੀਰ ਹੈ ਦੀਦਾ ਇਹ ਨਾਲੋਂ ਜ਼ੋਰ ਤੇ ਦੀ ਵਿਚਾਰ ਦੀ ਬਹੁਤੀ ਲੋੜ ਨਹੀਂ ਹੈ ਤਾਂ ਇਹਨੂੰ ਵੀ ਵਿਚਾਰਨਾ ਚਾਹਦੇ ਨੂੰ ਵਿਚਾਰ। ਉਹਦਾ ਸਾਤ ਸਰੂਪ ਉਹਨੂੰ ਵਿਚਾਰ। ਬਾਹਰਲਾ ਦਾ ਝੂਠ ਹੈ ਰੋਜ਼ ਚਿਹਰ ਬਦਲਣ ਦੀ ਹੈ ਜੀ। ਜਿੱਦਾਂ ਰੋਜ਼ ਬਦਲਦਾ ਹੈ। ਜੀ। ਠੀਕ ਹੈ ਜੀ ਪਰ ਜੋਗਮਤ ਜਿਹੜੀ ਹੈ ਉਹ ਸਭ ਦੱਦਾ ਦੇਖ ਜੋ ਬਿਨ ਸੰਹਾਰੇ ਪਰੇ ਖੜੀ ਹੈ ਜੀ। ਹਾਂ ਨਹੀਂ ਜੋਗਮਤ ਪਹਿਲਾਂ ਕੱਢੀ ਸੀ ਹੁਣ ਨਾਲ ਜੋਗਮਤ ਖੜੀ ਹੈ। ਉਹ ਤਾਂ ਅਸੀਂ ਵੀ ਬਾਹਰ ਲੈ ਕੇ ਖੜੇ ਹਾਂ ਉਹ ਵਿਚਾਰੇ ਕੀ ਕਰਨ ਬਹੁਤ ਪੁਰਾਣੀ ਗੱਲ ਹੈ ਅਸੀਂ ਤੇ ਬਾਹਰ ਲੈ ਕੇ ਠੀਕ ਹੈ ਉਹਨਾਂ ਨੇ ਯੋਗ ਅਭਿਆਸ ਸ਼ੁਰੂ ਕੀਤਾ ਸੀ ਆਪਾਂ ਨਾਮ ਅਭਿਆਸ ਸ਼ੁਰੂ ਕਰ ਲਿਆ ਹੈ ਜੀ ਉਹ ਨਾਮਤਾ ਅਭਿਆਸ ਤਾਂ ਹੀ ਨਹੀਂ ਅਭਿਆਸ ਤਾਂ ਸ਼ਰੀਰ ਨਾਲ ਹੁੰਦਾ ਨਾਮ ਨਾਲ ਅਭਿਆਸ ਜੀ ਲੱਗਿਆ ਕਰਮ ਨਾਲ ਅਭਿਆਸ ਲੱਗਿਆ ਹੈ ਸ਼ਬਦ ਲੱਗਿਆ ਹੀ ਨਹੀਂ ਹੋਇਆ ਨਾਮ ਦਾ ਅਭਿਆਸ ਹੁੰਦਾ ਵਿਚਾਰ ਸ਼ਬਦ ਵਿਚਾਰ ਹੁੰਦੀ ਹੈ ਠੀਕ है ਜੀ ਤਾਂ ਹੀ ਦੱਸਿਆ ਜੀ ਤਸ ਰਾਖ ਵਿਚਾਰਾ ਹਾਂ ਜੀ ਹਾਂ ਵਿਚਾਰਾ ਠੀਕ ਹੈ ਜੀ ਦਸਵੇਂ ਦਵਾਰ ਕੁੰਜੀ ਜਬ ਦੀਜੈ ਤੋ ਦਇਾਲ ਕੋ ਦਰਸ਼ਨ ਕੀਜੈ ਹਾਂ ਜੀ ਦਸਵੇਂ ਦਵਾਰ ਦੀ ਕੁੰਜੀ ਮਿਲ ਜੂਗੀ ਤੁਹਾਨੂੰ ਨਾੜਕਾ ਕੋਰਬੇ ਨੂੰ ਤਾਕ ਨੂੰ ਗੁਰ ਅਵਰਨ ਕੋ ਜੀਹਤ ਔਰ ਕੋਈ ਕੁਝ ਜੀ ਨਹੀਂ ਆਇਆ ਭਾਈ ਗੁਰਸਾਧੀਆਂ ਵਾਲਾ ਨੂੰ ਕੁਝ ਦਾਰ ਕੁੰਜੀ ਜਬ ਦੀਜਿਆ ਜਾਂ ਦਸਮਦਾਰ ਚਾਬੀ ਲੱਗੂਗੀ ਗਿਆਨ ਆਊਗਾ ਉਹਦੇ ਹਾਲ ਕੋ ਦਰਸ਼ਨ ਦਿਆਲ ਦਾ ਦਰਸ਼ਨ ਕਰ ਲਿਓ ਦਸਮਦਾਰ ਖੁੱਲੂਗਾ ਤਾਂ ਦਰਸ਼ਨ ਕਰ ਲਿਓ ਦਸਮਦਾਰ ਦਾ ਦਰਸ਼ਨ ਕਰ ਲਓ ਪਹਿਲਾਂ ਸਰਕੁਡੀ ਛੱਡੋਗੇ ਜੇੜੀ ਦਸਵੰਤਾਰ ਦੀ ਕੁਰਸੀ ਹੈ ਫਿਰ ਗੁੱਡੀ ਛਡਾਉਣ ਵਾਲੀ ਹੈ ਗਿਆਨ ਦਾ ਫਿਰ ਗੁੱਡੀ हां किसे नु ਦੋਸਤ ਨਹੀਂ ਦੇ ਸਕਦੇ ਅਸੀਂ ਦੱਦਾ ਨਾ ਦੇਉ ਕਿਸਾ ਦੋਸਤ ਕਰਮਾ ਆਪੜਾ ਸਾਡੀ ਆਪਣੀ ਜਿਹੜੀ ਕਰਮਾਂ ਸੋਚ ਐ ਸੋਚੀ ਕਰ ਉਹਨੂੰ ਦੋਸਤ ਜਿਵੇਂ ਆਪਣੇ ਪਾਣੀ ਚੱਲੇ ਆ ਉਹ ਗੁਰਕੇ ਪਾਣੀ ਚੱਲੇ ਆ ਆਪਣੇ ਪਾਣੀ ਚੱਲਣ ਦੇ ਨਾਲ ਵਿਛੜ ਚੋਟਾ ਖਾਏ ਵਿਛੜਾ ਰਹੂਗਾ ਚੋਟ ਪਊਗੀ ਜਮਦੀ ਜਮਨਾ ਡੰਡ ਸਰਚ ਲੱਗੂਗਾ ਹੀ ਲੱਗੂਗਾ ਜਮਣ ਵਾਲ ਲਈ ਕਟਿਆ ਜਾਣਾ ਗੁਰਕੇ ਪਾਣੀ ਦਾ ਹੀ ਜਾਣਾ ਇਸ ਕਰਕੇ ਜੇ ਸਾਡਾ ਜਨਮ ਮਨ ਦੀਟਿਆ ਗਿਆ ਤਾਂ ਸਾਡਾ ਆਪਣਾ ਦੋਸਤ ਹੈ ਦੋਸਤ ਨੂੰ ਦੇਉ ਕਿਸੇ ਦੋਸਤ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤਾਂ ਦੀਜਾ ਵਰਜਨੋ ਜੋ ਮੈਂ ਕੀਆ ਸੋਚਿਆ ਜੋ ਕੁਝ ਕੀਤਾ ਫਿਰ ਨਾਲ ਹੀ ਅਸੀਂ ਕੁਝ ਵੀ ਕਰ ਸਕਦੇ ਹ ਹੁਕਮ ਨਾ ਹੋਣ ਸੋਚ ਸਕਦੇ ਆ ਗੱਲ ਕੁਝ ਨਹੀਂ ਸਕਦੇ ਜੋ ਅਸੀਂ ਸੋਚਿਆ ਉਹ ਪਾ ਲਿਆ ਦੋਸਤਾਂ ਦੀਜਾ ਵਰਜਨੋ ਕਿਹਦੇ ਨੂੰ ਦੋਸਤ ਲੀਏ ਹਾਂ ਹਾਂਜੀ ਜੋ ਆਪਾਂ ਸੋਚਿਆ ਉਹ ਆਪਾਂ ਪਾ ਲੈਨੇ ਆ ਜੀ ਸੋਚਦਾ ਮੈਂ ਕੁਛ ਕਰ ਸਕਦਾ ਡਬਲ ਅੰਦਰ ਵਿਚੋਂ ਨਵੇਂ ਫਿਰਦਾ ਸਾਡੀ ਸੋਚ ਅਨੁਸਾਰ ਅਸੀਂ ਕੁਝ ਪਾਇਆ ਹੈ ਸੋਚਦਾ ਰਿਹਾ ਮੇਰਾ ਹੈ ਛੱਡਣੀ ਸੋਚੀ ਨਹੀਂ ਹੈ ਸੋਚਿਆ ਹੀ ਨਹੀਂ ਮਾਇਆ ਦਿੰਦੇ ਮਾਇਆ ਤੋਂ ਮਨੋਂ ਨਹੀਂ ਵਿਸਰਦੀ ਮਾਇਆ ਹੀ ਸੋਚੀ ਸੀ ਅਸੀਂ ਮਾਇਆ ਦੀ ਪ੍ਰਾਪਤੀ ਉਹ ਸੋਚੀ ਸੀ ਮਾਇਆ ਨਾਲ ਜੁੜੇ ਰਹਿਣੇ ਸੋਚਿਆ ਸੀ ਉਹ ਜੁੜੇ ਹੋਏ ਹੈਗੇ ਆ ਤੇ ਸਰੀਰ ਤੇ ਸਰੀਰ ਮਾਇਆ ਦਾ ਦੇਤਾ अच्छा ਪਰ ये ਜੇ किथे तक जे आपा ਨਾਲ ਸੋਚਦੇ ਆਂ ਜੁੜਨ ਦਾ ਆਪਾਂ ਜੁੜ ਸਕਦੇ ਆਂ ਜੁੜੇ ਤਾਂ ਹੈਗਾ ਹੀ ਸੋਚ ਹੈ ਆਪਣੀ ਆਪਣਾ ਭਾਣਾ ਹੀ ਆਪਣੀ ਸੋਚ ਹੈ ਨਾ ਅਸੀਂ ਚਾਹੁੰਦੇ ਕੀ ਹੋ ਮਾਇਆ ਛੱਡਣੀ ਚਾਹੁੰਦੇ ਆ ਜਾਂ ਮਾਇਆ ਨਹੀਂ ਛੱਡਣੀ ਚਾਹੁੰਦੇ ਇਹ ਛੱਡਣੀ ਚਾਹੁੰਦੇ ਹੀ ਨਹੀਂ ਤੇ ਮਾਇਆ ਆਪੇ ਛੁੱਟ ਜੂ ਜੇ ਮਾਇਆ ਨਹੀਂ ਛੁੱਟਦੀ ਜੰਮੜਮਨ ਬਣਿਆ ਰਹੂ ਉਹ ਗਾਹ ਦੀ ਗੱਲ ਹੈ ਨਾ ਜੇ ਮਾਇਆ ਦੀ ਛੁੱਟੂ ਫਿਰ ਕੀ ਹੋਊ ਬਿਜੰਮੜਮਨ ਬਣਿਆ ਰਹੂਗਾ अच्छा जरूर करें जो मैं की आई ना की बाबा सो मैं पाया जो मैं सोचया वो मैं पाया आपा त के नहीं सोच ही सकदे होवे ना होवे जरूरी त नहीं है प्राप्ति जो करनो आया सी जो सोचया वो पाया गुर के पाणे चलदा ता और कुछ प्राप्ति सी अपने पाड़े चलनु और कुछ प्राप्ति ਉਹੀ ਪਿਛਲੇ ਸ਼ਬਦ ਤੋਂ ਹੀ ਕੌੜੀ ਤੋਂ ਚੱਲ ਰਿਹਾ ਜੀ ਕੱਗੈ ਘਰ ਘਰ ਫਿਰੈ ਤੂੰ ਮੂੜੇ ਦਾਨ ਨਾ ਤੁਦ ਲਿਆ ਕੱਗਾ ਘਰ ਘਰ ਫਿਰੈ ਤੂੰ ਮੂੜੇ ਸੰਤ ਬਣਿਆ ਘਰ ਘਰ ਤੁਰਿਆ ਫਿਰਦਾ ਕੁੱਤੇ ਵਾਂ ਦਾਨ ਨਾ ਤੁਦ ਲਿਆ ਤੇਰੇ ਅੰਦਰ ਦਾਤਾ ਬੈਠਾ ਹੈ ਅੰਤਰਾਤਮਾ ਦੀ ਆਵਾਜ਼ ਹੈ ਉਹ ਤੋਂ ਲਿਆ ਨਹੀਂ ਕੁਝ ਦਾਨ ਤਾਂ ਉਹ ਦਿੰਦਾ ਸੀ ਉਹਦੇ ਅਨੁਸਾਰ ਨਹੀਂ ਚੱਲਿਆ ਬਾਹਰ ਫਦਾ ਗੱਲ ਔੜਦਾ ਫਿਰਦਾ ਰਿਹਾ। ਹਾਂਜੀ। ਇਹ ਫਿਰ ਦੋਸਤ ਹੁਣ ਇਸ ਗੱਲ ਦਾ? ਦੋਸਤ ਕੇ ਸਾਨੂੰ ਵੀ ਦੇਣਾ। ਜਿਹਨੇ ਖਾਇਆ, ਖਰਿਆ ਹੋਈ ਭਾਇਆ। ਇਹਨੂੰ ਦਾਵੇ ਦੋਸਤ। ਕਿਸੇ ਨੇ ਚਲ ਉਲਟੀ ਮੱਤ ਵੀ ਦਿੱਤੀ ਬੰਦ ਉਹ ਗੱਲ ਅਲੱਗ ਆ ਵੀ ਉਹਦਾ ਦੋਸਤ ਹੈ। ਉਹਦਾ ਦੋਸਤ ਜਿਹਨੇ ਪੈਦਾ ਕੀਤਾ। ਉਹ ਲਊਗਾ ਤਾਂ ਉਲਟੀ ਮੱਤ ਕਿਉਂ ਦਿੱਤੀ। ਉਹਦੇ ਨੇ ਲਈ ਕਿ ਉਥਵਾਲਤਾ ਹੈ। ਇਹ ਦੇਖੋ ਦੋਏ ਗੱਲਾਂ ਨੇ ਉਹਦੇ ਆਲੀ ਕਿ ਮੰਨ ਲਈ ਗੁਰੂ ਵਾਲੀ ਚੋਣੀ ਬਦੀ ਗੁਰ ਬਾਣੀ ਦੀ ਗੱਲ ਸਭ ਨੂੰ ਪੰਨੇ ਦੇ ਅੰਦਰ ਹੈ ਬਾਹਰ ਬਾਤ ਮਤਲਬ ਇਹ ਵੀ ਸਭ ਦੇ ਵਿਚਾਰ ਨੂੰ ਬਾਣੀ ਜਗ੍ਹਾ ਜਗ੍ਹਾ ਕਹਿਦੀ ਅਖਿਲ ਦੀ ਗੱਲ ਦੇ ਨਾਨਕ ਕੋਕਬੁਰ ਨੇ ਕਹ ਲਈ ਨਾਲ ਖਸਮ ਚੱਲੇ ਅਰਦਾਸ ਫਿਰ ਇਹ ਹੁਕਮ ਕਦ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਖੜੇ ਹੋ ਕੇ ਅਰਦਾਸ ਲਈ ਉਹ ਅਰਦਾਸ ਕਹਿ ਤਾ ਹੁਕਮ ਹੈ ਉਹ ਉਹ ਹੁਕਮ ਉਹ ਅਰਦਾਸ ਖੇ ਦੇ ਤਾ ਹੁਕਮ ਕਰ ਦੇ ਐਸਾ ਕਰੋ ਜੀ ਵੈਸਾ ਕਰੋ ਕਰੋ ਜੀ ਕਰੋ ਜੀ ਇਹ ਤਾਂ ਹੁਕਮ ਅਰਦਾਸ ਹੀ ਸੱਤ ਸੰਤੋਖ ਹੋਵੇ ਅਰਦਾਸ ਸੱਤ ਸੰਤੋਖ ਵਾਲੇ ਪਾਸ ਉਹ ਕਹਦਾ ਨਹੀਂ ਕਰਦੇ ਸਭ ਬੇਇਮਾਨੀਆਂ ਨੇ ਤੇ ਬੇਇਮਾਨੀ ਕਰੂਗਾ ਭੈ ਉਹਦੀ ਬੇਇਮਾਨੀ ਮੈਂ ਪਾਇਆ ਠੀਕ ਹੈ ਜੀ ਹੁਣ ਹੈ ਜੀ ਤੋਂ ਉਪਦੇਸ਼ ਬਾਵਨ ਅਖਰੀ ਮਹਲਾ ਪੰਜਵਾਂ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੂਟ ਨਾ ਆਵਈ ਅਗਣਤ ਭਰੇ ਭੰਡਾਰ ਹਾਂ ਦੱਦਾ ਦਾਤਾ ਇਹ ਕਹੇ ਸਭ ਕੋ ਦੇਵਨ ਹਾਰ ਨਹੀਂ ਕੋਈ ਦਾਤਾ ਦੱਦੇ ਦਾ ਉਪਦੇਸ਼ ਹੈ ਸਭ ਕੋ ਦੇਵਨ ਸਭ ਨੂੰ ਦਿੰਦਾ ਨਾਲ ਸਭ ਨੂੰ ਮਿਲਦਾ ਜਦ ਪਤਾ ਦੱਦਾ ਦਾਤਾ ਇਹ ਕਹੇ ਕੋ ਦੇਵਨ ਇਥੋਂ ਜਾ ਕੇ ਨਕਰਾਂ ਨੂੰ ਦਾ ਅਰਦਾਸਾਂ ਕਰਾਉਣਾ ਕੀ ਫਾਇਦਾ ਦਿੰਦੇ ਟੂਟ ਨਾ ਆਵਈ ਦੇ ਲੈਂਦੇ ਥੱਕ ਪਾਏ ਰੋਜ਼ ਜਬੀਰ ਸਾਹਿਬ ਪੜਦਾ ਵਿਸ਼ਵਾਸ ਕਰਦਾ ਜੀ ਕਾਸ ਨੂੰ ਪੜਦਾ ਪੜਦੇ ਕਾਸ ਨੂੰ ਉਹ ਬਾਣੀਏ ਵਿਸ਼ਵਾਸ ਅੱਜ ਕਰਨਾ ਜਿੰਦੇ ਟੋਡਰਾ ਵਈਓ ਨੂੰ ਦੰਦੇ ਨੂੰ ਤੋੜੀ ਨੇ ਮੁੱਕਦੇ ਹੀ ਨਹੀਂ ਕੋਈ ਨਾ ਉਹ ਲਿਖਦਾ ਵੀ ਇਹਨਾਂ ਬਾਕੀ ਬਚ ਗਿਆ ਬੈਲੈਂਸ ਕੱਢਦਾ ਹਾਂਜੀ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਵਿਚਾਰਾ ਜਿਹੜਾ ਦੇਣ ਹਾਰੋ ਤਾਂ ਸੱਜੀ ਬਣਾ ਸਦਾ ਹੀ ਚੋਂਦਾ ਸਾਰਿਆਂ ਨੂੰ ਦੇ ਰਿਹਾ ਜੱਦਾ ਉਹ ਨਹੀਂ ਮਰਿਆ ਇਹ ਮਰਮਰ ਚਾਈ ਜਾਂਦੇ ਨੇ ਇਸ ਧੀ ਛੱਡ ਕੇ ਦੂਆ ਧੀ ਲੈ ਕੇ ਆ ਜਾਂਦਾ ਫਿਰ ਦੇਈ ਜਾਂਦਾ ਦੇਣ ਹਾਰ ਸੱਜੀ ਬਣਾ ਰਹਾ ਮਨ ਮੂਰਖ ਕਿਉਂ ਤਸੇ ਵਿਸਾਰ ਫਿਰ ਹੋਇਆ ਭੁੱਲਿਆ ਹੋਇਆ ਮਨ ਮੂਰਖ ਕਿਉਂ ਤਾਹੇ ਵਿਸਾਰਾ ਵਿਸਾਰਿਆ ਕਰਕੇ ਮੂਰਖ ਉਹਨੂੰ ਵਿਸਰਿਆ ਹੋਇਆ ਸਾਨੂੰ ਕਿਹਾ ਸੀ ਮਨ ਮੂਰਖ ਤੈਨੂੰ ਬਸਾਰਿਆ ਤੈਨੂੰ ਉਹਨੂੰ ਵਿਸਾਰਿਆ ਅਸੀਂ ਵੀ ਵਿਸਾਰਿਆ ਹੋਇਆ ਖਾਨੇ ਨਾਲ ਪੜੀ ਜਾਂਦੇ ਨਾਲੇ ਵਿਸਾਰਿਆ ਹੋਇਆ ਉਹਨੂੰ ਵੀ ਦੱਸਦਾ ਵੀ ਕਿਉਂ ਵਿਸਾਰਿਆ ਅਸੀਂ ਉਪਰੇਦ ਵੀ ਸਾਡੇ ਕੋਲ ਵੀ ਹੋਇਆ ਇਹ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਮੇਟੀ ਦਾ ਇਹ ਕਰਦੇ ਨੇ ਆਹੀ ਕੱਲ ਦੇ ਸਤਕਾਰ ਕਰਾਉਂਦੇ ਨੇ ਆਪ ਕਰਦੇ ਸੀ ਕਹਿੰਦਾ ਸਤਕਾਰ ਕਰਦੇ ਨੇ ਜੀਵਨ ਹਾਰਾ ਫਿਰ ਹੁਣ ਹੁਕਮ ਦੀ ਗੱਲ ਹੋ ਰਹੀ ਹੈ ਜੀ ਹੁਕਮ ਦੀ ਗੱਲ ਨਹੀਂ ਹੋ ਹੁਕਮ ਦੀ ਗੱਲ ਹੋ ਰਹੀ ਹੈ ਦੇਨ ਹਾਰ ਉਹ ਹੁਕਮ ਨਾਲ ਤਾਂ ਦਿੱਤਾ ਜਾਂਦਾ ਸੱਚਖੰਡ ਸਦਾ ਹੀ ਚੁੰਦਾ ਅੱਜ ਸਦਾ ਹੀ ਰਹਿਣਾ ਸੱਚ ਕਦ ਨਹੀਂ ਹੁਦਾ ਸੱਚ ਜਵਾਦ ਸੱਚ ਹੈ ਵੀ ਸੱਚ ਨਾਨਕੋ ਸਿੱ ਵੀ ਸੱਚ ਸੱਚ ਖੜਦਾ ਨਿਰੰਕਾਰ ਨਿਰੰਕਾਰ ਜੋ ਹੈ ਉਹ ਦੇਣ ਹੈ ਜੋਤ ਦੇਣ ਹਾਰ ਹੈ ਸਾਰਿਆਂ ਦਾ ਕਲੈਕਟਿਵ ਸਿੱਖੋ ਹੁਕਮ ਦਾ ਸਾਰਿਆਂ ਦਾ ਕਲੈਕਟਿਵ ਉਹ ਉਹਨਾਂ ਦਾ ਮਿਲਦਾ ਹੈ ਨਾ ਦੈਣ ਵਾਲਾ ਹੱਕ ਮੈਂ ਜੀ ਫੇਰ ਵਾਲਾ ਹੱਕ ਮੈਂ ਠੀਕ ਹੈ ਜੀ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਹਰ ਮੀਤਾ ਕੋਈ ਦੋਸ ਤੈਨੂੰ ਨਹੀਂ ਹੈਗਾ ਪ੍ਰਭ ਨੇ ਤੇਰੇ ਪ੍ਰੋਬਲਮ ਆਇਆ ਦੇ ਮੋਹ ਦੇ ਬੰਦਣ ਦੀ ਤੈਨੂੰ ਮਾਇਆ ਮੋਹ ਪ੍ਰਭ ਦੇ ਦੋਸ ਆ ਫਿਰ ਉਹ ਲਾਫਤਾਂ ਜਾ ਗਿਆ ਉਹਦੇ ਹੱਥ ਕੇ ਪ੍ਰਭ ਦੇ ਹੱਥ ਚ ਪ੍ਰਭ ਨੇ ਪ੍ਰਭੂ ਦੇ ਨਕਤੀ ਕਰਕੇ ਜਿੱਦਣ ਦੋਸ਼ ਮੁਕਤ ਹੋ ਗਿਆ ਪ੍ਰਭੂ ਬਣ ਜਾਣਾ ਉਹਦੇ ਜੇ ਉਹ ਪ੍ਰਭੂ ਹੈ ਪ੍ਰਭੂ ਕਹਾ ਗਿਆ ਉਹ ਪ੍ਰਭੂ ਆ ਬੇ ਜਾਣਨ ਹਾਰ ਹੋ ਤੇ ਉਹਨੂੰ ਵੀ ਸਮਝ ਆ ਜਾਂਦੀ ਹੈ ਵੀ ਨਹੀਂ ਆ ਨਹੀਂ ਜਾਣਨ ਹਾਰ ਪ੍ਰਭੂ ਪ੍ਰਵੀਰ ਪ੍ਰਭੂ ਹੁੰਦਾ ਪ੍ਰਵੀਨ ਹੋ ਜਾਂਦਾ ਫਿਰ ਜਾਣਨ ਹੋ ਜਾਂਦਾ ਹਾਂਜੀ ਦਰਦ ਨਿਵਾਰਾਂ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖੀ त्राਪੇ ਦਰਦ ਨਿਵਾਰ ਕਰਦਾ ਤੇ ਰਾਜੇ ਮਾਇਆ ਦੀ ਕੋਰਣ ਦੀ ਉਹਨਾਂ ਗੁਰਮੁਖੀ ਤੇ ਤੇ ਉਹ ਆਨੰਦ ਹੋ ਜਾਂਦਾ ਆਨੰਦ ਰਹਿੰਦੇ ਨੇ ਤੇ ਆਪੇ ਕੌਣ ਹੈ ਜੀ ਉਹਦੇ ਦਰਦ ਨਿਵਾਰਾਂ ਜਾ ਕੇ ਆਪੇ ਆਪਣਾ ਮੂੜ ਦੇਖਾਰਾ ਕੀਤਾ ਮਾਇਆ ਮੋ ਬੰਦ ਪ੍ਰਭ ਕੀਤਾ ਪ੍ਰਭ ਰਬੇ ਨਿਵਾਰੂ ਦੱਸ ਹੁਣ ਇਹ ਕਿਵੇਂ ਨਿਵਾਰੂਗਾ ਜੀ ਪ੍ਰਭ ਦਾ ਹੀ ਮਨ ਹੈ ਉਹਨੇ ਨੂੰ ਦੂਏ ਫਸਲਾ ਉਹਦੇ ਆਪਣਾ ਜਾਤ ਹੈ ਖੇਡ ਦਾ ਮਾਇਆ ਚਾਲੇ ਖੇਡਣ ਦਾ ਕੀ ਕਰਦਾ ਜਾਂ ਛੱਡ ਦੂਗਾ ਛੱਡ ਮਾਇਆ ਦੀ ਕਿਹੜੋ ਹਾਲੇ ਕਾਕੇ ਸੇ ਵੀ ਖੇਡਦਾ ਸਰੀਰ ਹੈ ਬਾਹਰ ਲਾਏ ਨਾਲ ਖੇਡਦਾ ਇਹਨੂੰ ਛੱਡ ਕੇ ਫਿਰ ਪੱਕੇ ਸੇ ਵੀ ਲੱਗ ਜਾਂਦਾ ਇਹੋ ਉਹ ਨਾਲ ਖੇਡਦਾ ਅਨ ਆਪਣੇ ਬਾਣੀ ਵਿਚੇੜਦਾ ਫਿਰ ਗੁਰਦੇ ਬਾਣੀ ਵਿਚੇੜਣ ਲਈ ਜਾਂਦਾ ਠੀਕ ਹੈ ਜੀ ਇੱਥੇ ਆਪਣਾ 34ਵੀਂ ਪੌੜੀ ਦਾ ਸੰਦੇਸ਼ ਸਮਾਪਤ ਹੈ ਜੀ ਚਾਰੇ ਬਾਣੀਆਂ ਚੋਂ ਇਹ ਉਪਦੇਸ਼ ਆਪਾਂ ਨੂੰ ਦੱਦੇ ਹੈ ਕਿਉਂਕਿ ਇਹ ਆਮ ਪੜੇ ਜਾਂਦੇ ਹਨ ਖਾਸ ਕਰ ਦੱਦਾ ਦੋਸਤ ਨੂੰ ਦੇਉ ਪੈ ਜਾਂਦਾ ਨਾ ਇਹ ਤਾਂ ਜਾ ਲੈਂਦੇ ਨੇ ਅੱਥਾ ਨੂੰ ਤਾਂ ਫਿਰ ਇਹ ਇੱਥੇ ਹੀ ਫਿਰੂਗਾ ਮਾਣਵਾਸ ਆਇਆ ਤੇ ਕੋਈ ਨਹੀਂ ਆਇਆ ਠੀਕ ਹੈ ਪ੍ਰਭ ਦਾ ਹੀ ਦੋਸ਼ ਹੈ ਪ੍ਰਭ ਦਾ ਜਰ ਜ਼ਿਕਰੂਗਾ ਇਹ ਗਿਆਨ ਤੋਂ ਜੇ ਪ੍ਰਭ ਮੰਨ ਜਾਂਦਾ ਤਾਂ ਫੇਰ ਹੋ ਤੋਂ ਪ੍ਰਭ ਹੋ ਗਿਆ ਡਰਾਂਡੋਗੀ ਵੀ ਪੋਸਟ ਹਾਂਜੀ ਜਦੋਂ ਇਹਦਾ ਜੀ ਕਰੂਗਾ ਦਰਦ ਨਿਵਾਰੇ ਜਾ ਕੇ ਆਪੇ ਫੇਰੇ ਵਾਪਸ ਇਥੋਂ ਗੁਰਮੁਖੀ ਹੋ ਕੇ ਵਾਪਸ ਚਲੇ ਜਾਏਗਾ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਕਬੀਰ ਜੀ ਕਹਿੰਦੇ ਦੱਦਾ ਦੇਖ ਜੋ ਬਿਨ ਸੰਹਾਰਾ ਉਸੇ ਗੱਲ ਨੂੰ ਦੇਹੀ ਗੁਪਤ ਵਿਦੇਹੀ ਦਿਸੈ ਪੰਜਵੇਂ ਪਾਸ਼ਾ ਨੇ ਲਿਖਿਆ ਹੈ ਜੀ ਹਾਂ ਜੀ ਠੀਕ ਹੈ ਜੀ ਇੱਥੇ ਦੱਦੇ ਅਖਰ ਦਾ ਉਪਦੇਸ਼ ਸਮਾਪਤ ਹੈ ਜੀ